ਹਾਂਜੀ ਬਾਬਾ ਜੀ। ਪੌੜੀ ਨੰਬਰ 7 ਜੀ ਧੰਨ ਧੰਨ RAM DAS GURU ਜਿਸੇ ਸਿਰਿਆ ਤਿਨੈ ਸਵਾਰਿਆ। ਹਾਂ ਜेन ਅਬਦਾਸ ਘੋੜਾ ਹੈ। ਹਾਂਜੀ ਜਿਸੇ ਸਿਰਿਆ ਤਿਨੈ ਸਵਾਰਿਆ। ਜਿਲੀ ਜੇਲਾਸੀ ਨਾਲਕ ਉਹਨੇ ਰਹਿਣ ਸਵਾਰਿਆ ਸੀ। ਅੱਛਾ ਜੀ। ਠੀਕ ਹੈ ਲੇਕਨ ਮਤ ਕੁਝ ਹੋਰ ਸੀ ਜਿਵੇਂ ਜੰਮਦੇ ਦੀ ਨਾਂਕਦੀ ਵੀ ਮਤ ਕੁਝ ਹੋਰ ਸੀ ਠੀਕ ਹੈ ਜੀ ਪਕਤ ਬਾਣੀ ਪੜ ਕੇ ਗਿਆਨ ਲੈ ਕੇ ਠੀਕ ਹੈ ਜੀ ਹੋਈ ਦੀ ਹੋਰ ਬੋਤ ਤਾਂ ਉਹੀ ਸੀ ਜੋ ਬਚਪਨ ਸੀ ਲੇਕਿਨ ਰਾਮਦਾਸ ਨੇ ਬਚਪਨ ਛੇਈ ਹੋਰ ਮਤ ਹੋਈ ਠੀਕ ਹੈ ਜੀ ਜਾਇ ਕਰ ਬੰਦੀ ਤਾਂ ਬਾਸ ਸਭ ਯੋਜਨੀਤ ਆ। ਆਮ੍ਰ ਦੂਆ ਜੜਿਆ ਹੀ ਨਹੀਂ ਹੋਇਆ। ਕਿਉਂਕਿ ਸ਼ੁਰੂ ਤੋਂ ਕੀ ਗੁਰੂ ਅਮਰਦਾਸ ਜੀ ਦੇ ਉਹਦੇ ਚ ਆਗੇ ਸੀ ਕੰਟੈਕਟ ਵਿੱਚ। ਹਾਂ ਉਹ ਬਚਪਨ ਤੋਂal ਦੀ ਜਿਹੜੀ ਲੰਗੀ ਸੀ ਲਾਇਆ ਸੀ ਇੱਥੇ। ਅੱਛਾ ਜੀ। ਜਾਂ ਫਾਇਦਾ ਨਹੀਂ ਦਾ થોੜੀ ਸੀ। ਹਾਂ ਜੀ। ਤੇ ਕੋਈ ਨਾ ਚਾਲ ਦੀ ਉੱਪਰ ਸੀਗੇ। ਠੀਕ ਹੈ ਉਹਦੇ ਸਦਨ ਲੇਰਨ ਸਿੱਧਾ ਸੁਣ ਕੇ ਤੇ ਜੋ ਡਾਇਰੈਕਟਰ ਅੱਧਰ ਬਣ ਕੇ ਇਹ ਘਰੇ ਆਦਲ ਸੁਭਾਰੇ ਠੀਕ ਜੀ ਬਰੇਦੀ ਆਰਾਮ ਦਾਸ ਦਾ ਜਿਹੜਾ ਪੁੱਤਰ ਆਤਮਾ ਧੰਨ ਹਾਂਜੀ ਨਾਲਕਦੀ ਲੋੜ ਪਈ ਲੈ ਦੇ ਤੂੰ ਹਾਂਜੀ ਕਵੀਰ ਨੂੰ ਆਪਣੇ ਬੰਦੂ ਸੁਭਿਉਣ ਵਾਸਤੇ ਕਿਤੇ ਗਾਂ ਦੀ ਬਾਹਰੋਂ ਲੋੜ ਪਈ ਹਾਂਜੀ ਬਰੋਬਰ ਨੂੰ ਲੋੜ ਪਈ ਪਈ ਹਾਂਜੀ ਨੇ ਗਾਂ ਪੜਿਆ ਜਿਹੜੇ ਗਾਂ ਪੜਦੇ ਨੇ ਬੈਂਦੀ ਦੇ ਜਿਹੜੇ ਬੇਰ ਪਲਦੇ ਨੇ ਉਹ ਤੋਂ ਬੈਂਦੀ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਬੈਠੀ ਹੈਂ ਦੀ ਗੱਡੀ ਹਾਂਜੀ ਉਹ ਤਾਂ ਬੈਠੀ ਹੈ ਨਹੀਂ ਅੰਦਰ ਕਿਹੜਾ ਬੋਸ ਉਹ ਤਾਂ ਬੈਠੀ ਨਹੀਂ ਹੈ ਠੀਕ ਹੈ ਜੀ ਇਹ ਕੋਈ ਇੱਕ ਤਰ੍ਹਾਂ ਇੱਕ ਭੱਲਾ ਇੱਕ ਬ੍ਰੇਡ ਹਾਂਜੀ ਅਦਗੇ ਜਿਹੜੇ ਧਰਬਧਾਨ ਕਰਦੇ ਹੁੰਦੇ ਪਰਬਤ ਵਾਲਾ ਹੁੰਦੇ ਹੁੰਦੇ ਨੇ ਸਾਰੇ ਉਹ ਬੇਦੀ ਹੁੰਦੇ ਨੇ ਜਿਹਨੇ ਗੱਲ ਲੈ ਕੇ ਪਿੱਛਲਾ ਲਾ ਕੇ ਦੁਬਾਰਾ ਤੱਤ ਨਾ ਕੋਈ ਛੋਡੀ ਹੈ ਸਰੀਰ ਕਰਕੇ ਜੀ ਬਤਾ ਹੁਣ ਇਹ ਦਿਰਾਕਾਰੀ ਦੂਜੀ ਦੀ ਬਤਾ ਦਿਰਾਕਾਰੀ ਨੇ ਕੀ ਹੈ ਇਹ ਦਸ ਬਲਾਂ ਤੋਂ ਬਿਨਾ ਨਾਮ ਕਮੇਟੀ ਬਣ ਨਹੀਂ ਸਕਦਾ। ਨਾਲ ਨੂੰ ਬੇਸਿਕਲ ਵੜਾ ਦੂਗਾ। ਠੀਕ ਹੈ। ਨਾਲ ਦਾ ਬਾਪ ਬੇਟੀ ਦੀ ਹੈ। ਨਾਲ ਕਮੇਟੀ ਕਿਵੇਂ ਬਣ ਕੇ? ਠੀਕ ਹੈ। ਇਹ ਸਿਰਿਆ ਬੇਨਾ ਉਹਦੇ ਵਿੱਚ ਹੋਈ ਹੈ ਗੱਲ। ਹੂੰ ਹੂੰ। ਦੂਗੇ ਹੋਰ ਬਾਤ ਹੈ ਜੀ। ਸਪੈਸ਼ਲੀ ਆਖੇ ਇਹਦਾ ਇਹਦਾ ਟਕਰਾਅ ਨਹੀਂ ਹੋਇਆ ਗੁਰਮਤਨ। ਅੱਛਾ। ਉਹਨਾਂ ਦਾ ਗੁਰਮਤਨ ਤੋਂ ਤਗਰਾਓ ਸੀ ਠੀਕ ਹੈ ਕਾ ਤੁਸਾਂ ਬਗਉਤੀ ਜੇ ਬੁਲਕੇ ਬੋਲ ਨਾਮ ਕ ਲਈ ਤੇ ਆਏ ਬੋਲਾਂ ਦੇ ਧਿਆਨ ਚ ਬਾਤ ਚਾਹੀਏ ਫੈਲ ਨਹੀਂ ਸੀ ਹੂੰ ਹੂੰ ਬਰਨਿਓ ਬਖਸ਼ਬਾਨੀ ਬੜੀ ਹੋਊਗੀ ਬਖਸ਼ਬਾਨੀ ਜਿਹੜਾ ਕੀ ਆਪੀ ਗਲਤ ਆ ਐਜੜੀ ਸੁਣਦੇ ਬੰਦਿਆਂ ਤਾਂ ਹੈ ਨਹੀਂ ਹਾਂਜੀ ਜੇ ਵੀ ਕੁਝ ਹੋਰ ਥੋੜਾ ਹੋਇਆ ਸੀ ਐਸੋਟ ਪਹਿਲਾਂ ਠੀਕ ਹੈ ਬਸ ਜੋ ਪ੍ਰਚਲਨ ਦਾ ਸਾਰਾ ਸੁਣੀ ਹੋਈ ਹੈ ਜਿਹੜੇ ਬਦਰਗੰਗ ਦੇ ਸਾਰੇ ਹੀ 베ਦੀ ਨੇ ਠੀਕ ਹੈ ਜੀ ਜਿਹੜੇ ਕੁਰਬਾਨੀ ਦੇ ਗਿਆਨ ਨੇ ਪਹਿਲਾ ਮਤ ਹੋਰ ਸੀ ਪਹਿਲਾ ਰੰਗ ਲੱਗੇ ਜਾਂ ਦੂਆ ਰੰਗ ਜਾਂਦਾ ਜਿਹਨੂੰ ਉਹ 베ਦੀ ਨਹੀਂ ਉਹ ਡਾਇਰੈਕਟਰ ਆਪਣੇ ਆਪ ਦਾ ਕਰਦਾ ਠੀਕ ਹੈ ਉਹਦੇ ਨਾਲ ਬਾਗਰੇ RAMDAS ਦੇ ਗੁਰਦੇ ਨੂੰ ਸਿੱਧੇ ਰੂਪ ਕੀ ਮਤ ਹੈ ਜਿਹੜਾ ਹੁਣ ਅਖਰ RAMDAS ਹੈ ਇਹਦੇ ਨਾਲ ਗੁਰ ਲੱਗ ਗਿਆ ਹੁਣ ਗੁਰ ਕੀ ਅਜਿਹਾ ਕਿ ਤੇ RAMDAS ਦਾ ਵੀ ਨਹੀਂ ਅੱਛਾ ਜੀ ਤੇਰਾ ਕਰਕੇ ਝੇਲਾ ਗੁਰ ਨੇ ਆਪਣਾ ਮਾਨ ਆਪੇ ਸਮਾਵੇ ਆਪਣੀ ਸਰੀਆਸੀ ਮਨ ਪਰ ਜਿਹੋਤ ਆਪੇ ਪੈਦਾ ਕੀਤੀ ਹੈ ਤਾਂ ਇਹ ਜਿਵੇਂ ਕਹਿਣਾ ਆਪ ਨਰੈਣ ਕਲਾ ਧਾਰ ਜਦਵੇ ਬਰਬਰਿਓ ਹਾਂਜੀ ਉਹ ਜਿਹੜਾ ਅੰਦਰ ਆਦੂ ਕਲਾ ਐਸੀ ਧਾਰੀ ਆਏ ਸਰੀਰ ਤੇ ਬਰਬਰਿਆ ਹੋਇਆ ਕਰਕੇ ਜੋਤ ਕਰਕੇ ਉਹ ਜਿਹੜਾ ਮਨ ਆਪ ਸਿਰ ਜੈਸੀ ਉਹ ਆਪੇ ਸੁਭਜ ਆਇਆ ਕੀ ਹੈ ਉਹਨੇ ਖਾਇਆ ਛਡਾ ਲੀਏ ਹੋ ਤੇ ਠੀਕ ਹੈ ਜੀ ਮਾਇਆ ਦੀ ਭੁੱਖ ਪੈਦਾ ਹੀ ਹੋਰਦੀ ਏ ਇਹਦੇ ਵਿੱਚ ਮਾਇਆ ਦੀ ਲੋੜ ਹੈ ਭੁੱਖ ਨਹੀਂ ਹੈ ਭੁੱਖ ਸਾਨੂੰ ਨਾਭਦੀ ਚਾਹੀਦੀ ਹੈ ਮਾਇਆ ਦੀ ਲੋੜ ਦੇ ਸ਼ਰੀਰ ਕਰਕੇ ਹੂੰ ਹੂੰ ਮਾਇਆ ਦੀ ਜਦ ਤੱਕ ਭੁੱਖ ਬਣਗੀ ਤਾਂ ਨਾਭਦੀ ਭੁੱਖ ਪੈਦਾ ਨਹੀਂ ਹੋਣੀ ਕਿਉਂ ਮਾਇਆ ਦੀ ਭੁੱਖ ਬਣੂ ਹੋ ਗਈ ਜੇ ਲੋੜ ਨੂੰ ਭੁੱਖ ਬਣਾ ਲਿਆ ਬੰਨ ਲਿਆ ਬੰਨ ਇਹ ਹਾਂਜੀ ਕਾ ਨਾਮ ਦੀ ਤੁਹ ਕੇ ਠੀਕ ਹੈ ਜਿਹੜਾ ਹੋਇਆ ਅਖਰ ਰਾਮਦਾਸ ਮੁਖਤਾਇਦਮ ਲਬਤ ਰਾਮਦਾਸ ਦਾ ਗੁਰ ਦਾ ਗਿਆਨ ਬਈ ਹਾਂਜੀ ਰਾਮਦਾਸ ਗੁਰਤਾਨ ਹੈ ਇਹ ਜਿਹੜਾ ਗੁਰ ਹੁੰਦਾ ਅੱਛਾ ਜੀ ਇਹ ਜੀ ਹਰਦਾ ਆਪਣੇ ਆਪ ਨੂੰ ਦਾਸੇ ਸਾਰੇ ਤੇ ਬਾਣੀ ਦੀ ਜਿਹੜੀ ਭਾਸ਼ਾ ਹੈ ਜਾਂ ਬੋਲੀ ਆ ਉਹਦੇ ਸਾਹ ਨਾਲ ਆਪਾਂ RAMDAS ਨੂੰ ਗੁਰੂ ਨਹੀਂ ਕਹਿ ਸਕਦੇ ਠੀਕ ਹੈ ਜੀ ਹਾਂ ਗੁਰੂ ਨਹੀਂ ਕਹਿ ਸਕਦੇ ਗੁਰੂ ਦਾ ਹੈ ਜਿਹੜਾ ਗੁਰੂ ਹੈ ਹਾਂ ਪਰਮੇਸ਼ਰ ਹੈ ਹਾਂ ਜੀ ਉਹਦੇ ਚੱਲਣ ਜਿਹੜਾ ਬਾਣੀ ਚੱਲਦਾ ਉਹ ਦਾਸੇ ਹੁੰਦਾ ਠੀਕ ਹੈ ਜੀ ਠੀਕ ਹੈ ਅਸਵੇ ਜੇ ਰਬਾਇਆ ਬੋਲਦਾ ਦੱਸਦੇ ਆ ਸਤਿਗੁਰੂ ਜੀ ਦਾ ਸਾਰਾ ਜਿੱਥੇ ਭਗਤ ਸਾਰੇ ਸਤਿਗੁਰ ਦੇ ਵਿੱਚ ਸਾਰਿਆਂ ਦੀ ਜਿਹੜੀ ਇੱਛਾ ਹੈ ਸ਼ਕਤੀ ਹੈ ਆਵਾਜ਼ ਹੈ ਉਹਦੇ ਸਾਹਮਣੇ ਸਿਲੰਡਰ ਹੋਇਆ ਭਗਤ ਨੇ ਹਰੇਕ ਲਈ ਠੀਕ ਹੈ ਕਹ ਲੈ ਹੂੰ ਹੂੰ ਪਾਲੇ ਵੇ ਕੇ ਕਲਨ ਆਪੋ ਤੇ ਪਾਲੇ ਚ ਚਰਾਉਣਾ ਆਪਣੇ ਮਨ ਨੂੰ ਬੁਲਾਉਣਾ ਤੇ ਲੋਕਾਂ ਨੂੰ ਉਪਦੇਸ਼ ਕਰਨਾ ਇਹ ਭਗਤ ਦਾ ਕੰਮ ਹੈ ਇਹ ਕਰਕੇ ਸਾਰੇ ਦਾਸ ਕਬੀਰ ਵੀ ਦਾਸ ਹੈ ਦਾਸ ਕਬੀਰ ਹਾਂਜੀ ਇਹ ਰਹਾ ਰਵਿਦਾਸ ਉਹ ਵੀ ਦਾਸ ਹੈ ਦੇ ਨਾਲ ਦੇ ਠੀਕ ਹੈ ਜੀ ਕਿਹੜਾ ਸਵਾਰਿਆ ਹੈ ਸਵਾਰਿਆ ਕੋਈ ਹੋਰ ਨਹੀਂ ਉਹਨੇ ਉਹਨੇ ਆਪਣਾ ਹੀ ਬੰਦ ਸਵਾਰਿਆ ਹੈ ਜਾਂ ਆਪਣਾ ਹੀ ਬੰਦ ਸਵਾਰਿਆ ਕਿਸੇ ਨੂੰ ਨਹੀਂ ਸਵਾਰਿਆ ਆਪਣਾ ਬੰਦ ਸਵਾਰਿਆ ਹੈ ਬੰਦ ਕਾਰਨ ਹੀ ਪੜੀਏ ਗਿਆ ਠੀਕ ਹੈ ਜੀ ਤੁਸੀਂ ਮੈਨੂੰ ਸਮਝਾਇਆ ਠੀਕ ਹੈ ਜੀ ਉਹੀ ਮਾਤਾ ਬਬੇ ਇੱਕ ਬੁੱਧ ਹੈ ਨਹੀਂ ਬਬੇ ਇੱਕ ਬੁੱਧ ਤਾਂ ਭੰਗੀ ਤੋਂ ਪਹਿਲਾਂ ਹੋਈ ਹੋਈ ਹਾਂਜੀ ਛੋਟਾ ਬੜਾਵਤ ਗੱਲ ਦਾ ਕਰੀ ਜਿਹੜੀ ਚੰਨਕਾ ਦੀ ਬੁੱਢੀ ਸੀ ਹਾਂਜੀ ਨੂੰ ਸਮਝਣਾ ਬੁੱਧੀ ਦਾ ਵਿਸ਼ਾ ਸਮਝ ਕੇ ਬਾਣੀ ਨੂੰ ਸੁਣੋ ਬਲੂ ਬਲੋੜਾ ਬਲੂ ਬੁੱਧੀ ਮੇਰੇ ਬੁੱਧੀ ਠੀਕ ਹੈ ਜੀ बुद्धि बदलेगी बदलेगी रोए बदलेगा कहीं तो पूरी हुई करामात आप सृजन हारे धारिया आज करामात पूरी होगी यही करामात है बुद्धि जा बदल जाना है करामात है जर करामात पूरी होगी फिर सृजन हा हारा कौन सृजन हारा सृजन हारा शब्द गुरु है हुकम ਉਹ ਨੇ ਵਿੱਚ ਉਹ ਕੋਲ ਨੇ ਆਪਣੇ ਵਿੱਚ ਸਵਾਲਿਆ ਇਹਨਾਂ ਨੂੰ ਆਪਣੇ ਵਿੱਚ ਸਵਾਲਿਆ ਸੁਰਤ ਸ਼ਬਦ ਨਾਲ ਝੁਟ ਗਈ ਇੱਕ ਵਕ ਹੋ ਗਏ ਹਾਂਜੀ ਨੇ ਆਪਣੇ ਵਿੱਚ ਸਵਾਲਿਆ ਜਿਵੇਂ ਸੁਨੋਧਾ ਦਰਿਆ ਨੂੰ ਸਵਾਲਣ ਆਪਣੇ ਵਿੱਚ ਠੀਕ ਹੈ ਜੀ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਯਾ ਦੇ ਆਹ ਕਹਿ ਕੇ ਨਮਸਕਾਰ ਕੀਤੀ ਐ ਸਿੱਖ ਸੰਗਤ ਨੇ ਠੀਕ ਹੈ ਜੀ 파ਰਬ੍ਰਮ ਦਾ ਰੂਪ ਦੇ ਕੇ 파ਰਬ੍ਰਮ ਦੀ ਗੱਲ ਕਰ ਰਹੇ ਨੇ ਨਾ ਹਾਂਜੀ ਦਾ ਬੈਠੇ ਦੇ ਰਹੇ ਨੇ 파ਰਬ੍ਰਮ ਦਾ ਉਪਦੇਸ਼ ਦੇ ਰਹੇ ਨੇ ਗੁਰੂ ਦਾ ਬੈਠੇ ਦੇ ਰਹੇ ਨੇ ਇਸ ਕਰਕੇ ਗੁਰੂ ਕਹਿੰਦੇ ਸੀ ਲੋਕ ਸਿੱਖ ਸੰਗਤ ਨੇ 파ਰਬ੍ਰਮ ਦਾ ਰੂਪ ਬੰਦ ਕੇ ਹੀ ਰੁਸਾਰਿਆ ਨਾ ਹਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਹਟਲਾਂ ਤੂੰ ਦੋਲਣਾ ਦੀ ਹੈ ਹਟਲ ਕਹਿੰਦੇ ਨੇ ਦੋਲੇ ਲੋ ਅੱਛਾ ਜੀ ਅੱਛਾ ਤੋ ਕਿਹੜਾ ਰਹੇ ਚਾਹੇ ਪੁਜਿਆ-ਪੁਜਾ ਹੋ ਜੇ ਕੰਮ ਅਤੋਲ ਪੁਰੇਰੇ ਬਦਲਦਾ ਨਾ ਬੋਲਾ ਕਹਾਂ ਟੋਲਿਆ ਜਾ ਸਕਦਾ ਵਜ਼ਨਦਾਰ ਗੱਲ ਐ ਸੱਚ ਦਾ ਵਜ਼ਨ ਇੰਨਾ ਤੋਲ ਐ ਤੋਲ ਐ ਹੂੰ ਹੂੰ ਲੋਲ ਐ ਗਹਿਰਾਈ ਦਾ ਨਹੀਂ ਪਤਾ ਕਿੰਨਾ ਇਹਦੀ ਦੀ ਗੱਲ ਐ ਬਲਕਿ ਉਹਦੇ ਕਰਕੇ ਚੱਲੇ ਗੋਲ ਇਹਦੇ ਵਿੱਚ ਠੀਕ ਹੈ ਜੀ ਆਹ ਤੋਲ ਅਡੋਲ ਅਤਲ ਤੇਰਾ ਅੰਤ ਵਾਰਿਆ ਤੇਰਾ ਅੰਤਲਾ ਅੰਦਾਜ਼ਾ ਬਾਰਾਂ ਬਾਰਾਂ ਨਾਲ ਬਤਾ ਦਿੱਦੀ ਦਾ ਅੱਛਾ ਜੀ ਜਦ ਤੇ ਯਾਗੇ ਖਤਮ ਹੋ ਗਿਆ ਗਿਆਨ ਗਿਆਨ ਦਾ ਬਾਲਾ ਪਾਸਾ ਨਹੀਂ ਰਹਿਦਾ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੂੰ ਪਾਰ ਉਤਾਰਿਆ ਕਹਣ ਤੇਰਾ ਬਚਨ ਬੋਲੀਏ ਸੇ ਕਲੁਰ ਬੁਰ ਜਿਹੜਾ ਬਚਨ ਬੋਲਦਾ ਸੇ ਕੱਛੀ ਇਹ ਵੇ ਤਾਂ ਕਿ ਐ ਜਿਹਨਾਂ ਨੇ ਹੋ ਗਏ ਜਿਹੜੇ ਚੱਲੇ ਨੇ ਭੋਗ ਕਰਕੇ ਨੇ ਸੇਵਾ ਆਇਆ ਤੈਨੂੰ ਤੈਨੂੰ ਸਮਝਿਆ ਤੇਰੇ ਸ਼ਬਦਾਂ ਦੀ ਨੇ ਬੰਦੇ ਜਿਹਨੂੰ ਤੂੰ ਕਹਿ ਰਿਹਾ ਭੋਗ ਕਰ ਹਾਂਜੀ ਉਹ ਭਾਰ ਉੱਤੇ ਭਾਇਆ ਤਾਂ ਪਰ ਚਲੇਗਾ ਠੀਕ ਹੈ ਜੀ ਹਾਂ ਉਹ ਜਿਹੜਾ ਪਰਬਤੋਂ ਦੂਰ ਹੋਵੇ ਪਰ ਲੈ ਆਡੇ ਚੋਂ ਬਾਹਰ ਨਿਕਲ ਜੇ ਰੋਲੇ ਲੈਣੇ ਨੂੰ ਕੱਟ ਕੇ ਬਾਹਰ ਹੋ ਗਏ ਤੇ ਲੋਕ ਨੇ ਲੈਣੇ ਦੇ ਪਰੇ ਹੋ ਗਏ ਤ੍ਰਿਯਾ ਪੱਛ ਸੇਵਾ ਜਿਹੜਾ ਹੈ ਇਹ ਮਨਚਿਤ ਕਰਕੇ ਸੇਵਾ ਹੈ ਜੀ ਆ ਬੰਨਣਾ ਹੈ ਜਿਵੇਂ ਉਹ ਕਹਿਣਾ ਹੋਵੇ ਕਰ ਅੱਛਾ ਜੀ ਇਹ ਗੁਰਬਾਣੀ ਕਹਿੰਦੀ ਹੈ ਤੂੰ ਬਨਣਾ ਤੁਰਿਏ ਬੰਦੀਏ ਬੰਨ ਕੀਤਾ ਪਾਓ ਕੋਈ ਗੱਲ ਕਰ ਆ ਗਿਆ ਆ ਗਿਆ ਠੀਕ ਹੈ ਜੀ ਲੱਭ ਲੋਭ ਜਦੋਂ ਬੁਣਿਆ ਪੁੱਟਿਆ ਬੱਟ ਦਿੱਤਾ ਬਾਓ ਉਸੇ ਦੀ ਗੱਲ ਹੈ ਠੀਕ ਹੈ ਜੀ ਲੱਭ ਇਹ ਵੀ ਆਉਂਦਾ ਠੀਕ ਹੈ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਭ ਲੱਭ ਲੋਭ ਮੋਹ ਸੀ ਇਹਨਾਂ ਅਭੀ ਇਸ ਵਾਰ ਜੋ ਸਾਰੀਆਂ ਚੀਜ਼ਾਂ ਖਤਮ ਕਰਤੀਓ ਠੀਕ ਹੈ ਜੀ ਇੱਥੇ ਇੱਕ ਇੱਥੇ ਹੰਕਾਰ ਦੀ ਥਾਂ ਲੱਭ ਵਰਤਿਆ ਹੋਇਆ ਕਾਮ ਕ੍ਰੋਧ ਲੋਭ ਮੋਹ ਇਹ ਇਹ ਜਵਸਤਾ ਪਹਿਲਾਂ ਹੀ ਖਤਮ ਹੁੰਦਾ ਅੱਛਾ ਜੀ ਤੁਹਾਨੂੰ ਹੋਵੇ ਹੈ ਜੇ ਨਾਮ ਆਉਂਦਾ ਹੀ ਹੰਕਾਰ ਖਤਮ ਹੋ ਜਾਂਦਾ ਪਹਿਲਾਂ ਅੱਛਾ ਜੀ ਲੋਭ ਇਹਦਾ ਹੋ ਸਕਦਾ ਹੁੰਦਾ ਹੈ। ਅੱਛਾ ਜੀ। ਉਹ ਤੋਂ ਬਾਅਦ ਹਾਂਜੀ। ਲੋਭ ਦਾ ਫਿਰ ਖਤਰਾ ਹੋ ਜਾਂਦਾ ਹੈ। ਹੂੰ ਹੂੰ। ਲੋਭ ਜਿਹੜਾ ਹੈਗਾ ਧਰਤ ਤੋਂ ਥੱਲੇ ਸਿੱਟਣ ਦਾ ਤੇ ਲੋਭ ਸਿੱਟਦਾ ਲੋਭ ਹੈ ਥੱਲੇ। ਅੱਛਾ ਜੀ। ਬਣਦਾ ਜਿਵੇਂ دیوار ਹੁੰਦੀ ਹੈ ਨਾ ਕੋਈ ਕਿਲੇ 'ਚ ਬਣਦੀ। ਹਾਂਜੀ। ਇੱਕ دیوار ਹੈ ਜਿਹੜਾ ਕਿਲੇ 'ਚ ਫੜ ਗਿਆ। ਫਿਰ ਉਸਦਾ ਲੋਭ ਆ ਲੱਭਾ ਫਿਰ ਹੋਰ ਕੀ ਜਾਂਦੀ। اچھا جی کیا دنیا دی بڑائی ہے پھر اے چیزاں دے نال دی اے ٹھیک ہے جی دنیا دی بڑائی وی لب دے وچ شاملا ہاں جی او ਤਦੂ ਰਹਿਣਾ ਉਹ ਤੇਰਾ ਤਾਂ ਕਿਉਂਕੋ ਸਾਜ ਰਹਿਣਾ ਉਹ ਨਾਂ ਨ ਕੋ ਬੱਦਾ ਕਰਦਾ ਜਿੱਤੇ ਮਿਰਤ ਨਾ ਜਨਮ ਹੋਈ ਜਰਾ ਨਾ ਉਹ ਨਾ ਜਨਮ ਨਾ ਉਹ ਤੇ ਬੜਾ ਪਾ ਕੋਤਾਨ ਤੇਰਾ ਅੱਛਾ ਓਤਾਲਤੰਦ ਉਹ ਹੈ ਦੀ ਜਨਮ ਹੈ ਦੀ ਜਰਾ ਰੋਗ ਹੈ ਦੀ ਤੇ ਤੇਰਾ ਪੈਸਕਾਰਿਆ ਪੈਸਕਾਰ ਕੀ ਪੈਸਕਾਰ ਦਾ ਕੀ ਜੇ ਆਪਾਂ मीनिंग ਲੈਣਾ ਹੋਵੇ ਡੀਪ मीनिंग ਕੀ ਹੈ ਉਹ ਤੇ ਸਰਬਈ ਕੋਈ ਅੱਛਾ ਜੀ ਪੈਸਕਾਰ ਦਾ ਉਸੇ ਹਾਜ਼ਰੀ ਹੈ ਬੋਲ ਬਾਲਾ ਅੱਛਾ ਦਾ ਇਸ ਉੱਤੇ ਸੱਚ ਦਾ ਹੀ ਬਹਿਰ ਹੈ ਇਹ ਦਾ ਬਹਿਰ ਹੈ ਉਸ ਹੋਰ ਕੁਝ ਨਹੀਂ ਗੇ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਹਾਂ ਲੈਣਾ ਉਹ ਵੀ ਤੂੰ ਹੀ ਹੈ ਬੰਦੇ ਅੱਗੇ ਕੋਈ ਫੰਗ ਨਹੀਂ ਲੈਣਾ ਹੁੰਦਾ ਲਾ ਲੈ ਲਿਆ ਹੋਵੇ ਲੈਣਾ ਹੁੰਦਾ ਅੱਛਾ ਜੀ ਨਾਨਕ ਤੋਂ ਇਸ ਗੱਲ ਨਾਨਕ ਦਾ ਹਰਥ ਹੈ ਜਿਹਦੇ ਬੰਦ ਠੀਕ ਹੈ ਨਾ ਨਦੋ ਲੈ ਅਦ ਗੁਰ ਅਮਰ ਗਿਆਨ ਦੇ ਰਿਹਾ ਹੋਇਆ ਉਹ ਜੇ ਤੋ ਆਪ ਗੁਰਦੇਵ ਹੈ ਤੇ ਅਮਰ ਹੈ ਅਮਰ ਹੋ ਚੁਕੇ ਠੀਕ ਹੈ ਜੀ ਇਹ ਵਿਚਾਰ ਹੈ ਮੇਰੀ ਵਿਚਾਰਤਾ ਇਹ ਹੈ ਠੀਕ ਹੈ ਤੇ ਜਦੋਂ ਕੋਈ ਤੇ ਗੁਰ ਅਮਰ ਜਿਹੜਾ ਹੈ ਇਹ ਭਾਈ ਆਪਣਾ ਗੁਰੂ ਸਾਹਿਬ ਵਾਸਤੇ ਨਹੀਂ ਆ ਤੇ ਮਤਲਬ ਕਿਹਾ ਤਾਂ ਲੈਣਾ ਸੀ ਇਹ ਤਾਂ ਅੰਗਦ ਤੇ ਉਹ ਮੈਂ ਗੁਰ ਅਮਰ ਗੁਰ ਅਮਰ ਦਾ ਲੈਣਾ ਲੈਣਾ ਜਿਹੜਾ ਸੀਦਾ ਲੈਣਾ ਸਰੀਰ ਕਰਕੇ ਨਾ ਅੱਛਾ ਜੀ ਉਹ ਆਲੇ ਆ। ਅੱਛਾ ਜੀ। ਕਿਸੇ ਨੂੰ ਲੈਣਾ ਹੁੰਦਾ ਨੇ ਦਿੱਤਾ ਤਾਂ ਲਿਆ। ਹਾਂ। ਤੈਨੂੰ ਲੈਣਾ ਹੋਇਆ। ਕਹਿੰਦਾ ਤੈਨੂੰ ਲੈਣਾ ਹੋਵੇ ਤਾਂ ਵਿਟਿਚ ਫਾਇਦਾ ਹੋਵੇ ਨੁਕਸਾਨ ਹੋਵੇ। ਸੱਖਾ ਜਾ ਕੇ ਜਿਹਦੇ ਖੱਟ ਲਿਆ ਜਾਨੂੰ ਮਦਦ ਤੋਂ ਲੈਣਾ। ਠੀਕ ਹੈ ਜੀ। ਉਹ ਲੈਣਾ ਠੀਕ ਸੀ ਵੜਿਆ ਹੀ ਦਾ ਅੰਗਤੀ ਅੰਗਦ ਤਾਂ ਬਾਹਰ ਚਲੇ ਜਾਣਾ ਅੰਗਦ ਜੀ ਦਾ ਆਬਰ ਹੋਇਆ ਨਾ ਬਾਦ ਵਿੱਚ ਹੂੰ ਹੂੰ ਕੋਦਾਂ ਅੰਗਦ ਕੋਦਾਂ ਅੰਗਦ ਅੱਛਾ ਜੀ ਹੱਥ ਪੈਰ ਢੀਂਦੇ ਅੰਦਰ ਹੋ ਅੰਗਦ ਤਾੜੀਆਂ ਨਹੀਂ ਹੈ ਵਿਚਾਲੇ ਹੂੰ ਉਹ ਬਰ ਪਾ ਗੱਡੀ ਬੈ ਜਾਵੇ ਜਿੰਨਾ ਦੀ ਰਹਿ ਸਕਦਾ ਆਠ ਘੜਾ ਹੋ ਜਾਏ ਜਿੰਨਾ ਦੀ ਰਹਿ ਸਕਦਾ ਸੱਤ ਵੱਡੀ ਜਾਵੇ ਜਿੰਨਾ ਰਹਿ ਸਕਦਾ ਛੇੜੀ ਚੀਜ਼ ਕੱਟਣ ਦੇ ਬਾਅਦ ਆਦਮੀ ਜਿੰਨਾ ਰਹਿ ਸਕੇ ਉਹ ਅੰਦਾਜ਼ ਅੱਛਾ ਜੀ ਜਿੰਦਾ ਅੰਦਾ ਉਹ ਅੰਦਾਜ਼ ਅੱਛਾ ਜੀ ਜਿੰਦਾ ਅੰਦਾ ਉਹ ਅੰਦਾ ਡੇੜਾ ਮਾਣਾ ਉਹ ਅੰਦਾ ਉਹਦਾ ਸ਼ਰੀਰ ਦਾ ਅੰਗ ਹੈ ਅੱਛੀ ਜੀ ਕਿਹਦਾ ਖੂੜ ਹੈ ਖੂੜ ਦੇ ਅੰਗ ਹੋਦੇ ਰਾਕੀ ਪਰਛਾਤ ਖੂੜ ਕੇ ਤਲਾ ਹੋਇਆ ਹੈ ਹਾਂ ਜੀ ਅਟਾ ਗੋੜਾ ਚੱਲਦੇ ਜਾਂਦਾ ਹੈ ਕੋਣ ਦਲਾ ਹੈ ਪ੍ਰਾਪਤ ਕਰਨਾ ਹੈ ਨਾ ਮਾਇਆ ਜੋ ਕੁਝ ਠੀਕ ਹੈ ਜੀ ਕੀ ਕਰਕੇ ਜਾਂਦਾ ਕਰੂਗਾ ਕਿ ਪਿਛਲੇ ਜਿਹੜੇ ਉਹ ਗੁਰੂਆਂ ਵਾਸਤੇ ਤਾਂ ਨਹੀਂ ਨਾ ਹੀ ਕਈ ਲਾਈਨ ਨਾ ਉਹਨਾਂ ਵਾਸਤੇ ਵੀ ਕਹੀ ਹੈ ਉਹਨਾਂ ਵਾਸਤੇ ਵੀ ਕੀ ਜਦ ਅੱਛਾ ਤਾਂ ਹੀ ਪ੍ਰਾਪਤ ਕੀਤਾ ਕੁਝ ਇਹ ਵੀ ਲੈਣਾ ਬਣ ਜੋ ਉਹਨੇ ਪ੍ਰਾਪਤ ਕੀਤਾ ਉਹ ਵੀ ਲੈਣ ਲਿਆ ਹੂੰ ਹੂੰ ਲੈਣਾ ਹੈ ਉਹ ਜੀਤ ਦੇ ਲੈਣਾ ਹੈ ਜੀ ਹਾਂਜੀ ਕਿ ਲੈਣ ਜੀ ਰੀਜ਼ ਕਰਕੇ ਦਾ ਵਾਲੇ ਠੀਕ ਹੈ ਜੀ ਸੱਲ ਜੋ ਲੈਣੇ ਨੇ ਕੀਤਾ ਉਹ ਉਹੀ ਪੈ ਚੱਲਿਆ ਬਾਹਰ ਬਦਲਣਾ ਸੀ ਮਨ ਜਿੱਤਣਾ ਸੀ ਆਪਣੇ ਜਿੱਤ ਲਿਆ ਠੀਕ ਹੈ ਗੱਲਾਂ ਹਨ ਗੁਰ عمر ਵਿਚਾਰਿਆ ਗੁਰ ਵਿਚਾਰਿਆ ਨਾ ਗਿਆਨ ਵਿਚਾਰਿਆ ਨਾ ਤਾਂ ਦਾ ਜੋ ਹੋ ਹੈ ਹਮਦਰ ਦਾ ਜੋ ਹੋ ਉਹ ਕੋਈ ਜਾ ਰਿਓ ਵੀ ਵਸਤਾ ਤੇਰੀ ਠੀਕ ਹੈ ਜੀ ਚਾਹੇ ਉਹ ਨਾਨਕ ਦੀ ਵਸਤਾ ਸੀ ਚਾਹੇ ਉਹ ਗੁਰਦੀ ਵਸਤਾ ਸੀ ਚਾਹੇ ਹੋ ਅੰਮ੍ਰਿਤਦਾਸ ਦੀ ਵਸਤਾ ਠੀਕ ਹੈ ਜੀ ਗੁਰ ਡਠਾ ਤਾਂ ਗਿਆਨ ਦਾ ਦਰਸ਼ਣ ਹੋਇਆ ਗੁਰ ਠੀਕ ਹੈ ਜੀ ਮਨ ਸੁਧਰਿਤ ਜਿਉਂ-ਜਿਉਂ ਗਿਆਨ ਦੀ ਸਮਝ ਹੁੰਦੀ ਗਈ ਪਤਾ ਲੱਗਦਾ ਕਿ ਬਿਲਕੁਲ ਵਨ ਬਦਲ ਗਿਆ ਵਨ ਬਦਲ ਗਿਆ ਵਨ ਸੱਦ ਗਿਆ ਸਾਧ ਆ ਰਿਹਾ ਵਨ ਸਾਧ ਤੇ ਸਤ ਆ ਰਿਹਾ ਸਤ ਪ੍ਰਾਪਤ ਹੁੰਦੀ ਰਹੀ ਸਾਰੀ ਸਮਝ ਆ ਗਈ ਠੀਕ ਹੈ ਜੀ ਹਾਂ ਉਹ ਦਤ ਸੋਦਤ ਦੋਦਤ ਸੀ ਹਰ ਲੋਕ ਖੁੱਦ ਕਰਦੇ ਕਰਦੇ ਕਰਦੇ ਕਰਦੇ ਸਾਰੀ ਗੁਰਜ ਖੁਦਗੀ ਜਦਾਂ ਜਰ ਉੜ ਗਿਆ ਹੋਇਆ ਉਹ ਜਦੋਂ ਬੰਦੇ ਇਹਦਾ ਲੋ ਅੱਛਾ ਜੀ ਉਹ ਗੁਰ ਪ੍ਰਸਾਦ ਤਤ ਸਭ ਗੁਜਿਆ ਠੀਕ ਹੈ ਜੀ ਉਹ ਗੱਲ ਦੀ ਵਿਆਖਿਆ ਹੈ ਦੂਜਾ ਰੂਪ ਹੈ ਉਹ ਪੜੀ ਹੈ ਉਹ ਬਾਣੀ ਦੇ ਬਿਚੋਈ ਗੱਲ ਕਰ ਰਹੇ ਹੈ ਠੀਕ ਹੈ ਜੀ ਤੇ ਤੁਸੀਂ ਨਹੀਂ ਵੀ ਆ ਗਿਆ ਤਾਂ ਸਤਿ ਸ੍ਰੀ ਅਕਾਲ ਜੀ ਠੀਕ ਹੈ ਇੱਥੇ ਹੁਣ 7ਵੀਂ ਪੌੜੀ ਦੀ ਸਮਾਪਤੀ ਹੈ